ਸ਼ਲੋਕ ਮਹੱਲਾ ਪੰਜਵਾਂ ਜਾਕੋ ਭਏ ਕਿਰਪਾਲ ਪ੍ਰਭ ਹਰ ਹਰ ਸੋਈ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਸਾਧ ਸੰਗਾਤ ਜਾਕੋ ਭਏ ਕਿਰਪਾਲ ਪ੍ਰਭ ਜੀਰ ਪ੍ਰਭ ਦੀ ਕਿਰਪਾ ਹੋ ਗਈ ਹਰ ਹਰ ਸੇ ਜਪਾਤ ਕੋਈ ਹਰ ਹਰ ਜਪਦੇ ਉਹਨਾਂ ਨੇ ਹਰ ਹਰ ਜਪਿਆ ਚਾਉਤ ਪ੍ਰੀਤ ਲੱਗੀ ਤਿਨ ਰਾਮ ਸਿਓ ਹਾਂਜੀ ਉਹਨਾਂ ਦੇ ਰਾਗ ਨਾਲ ਸੰਤਰਾਤ ਬੋਲਣਾ ਪ੍ਰੀਤ ਲੱਗੀ ਆਪਣੇ ਆਪ ਨੂੰ ਪ੍ਰੀਤ ਲੱਗੀ ਆਪਣੇ ਦੂਰ ਨਾਲ ਪ੍ਰੀਤ ਲੱਗ ਗਈ ਢੇੜ ਦੇ ਸਾਧ ਸੰਗਤ ਪ੍ਰੀਤ ਲੱਗਦੀ ਅੰਤਰਾਤ ਬੋਲ ਬਿਲਣਾ ਹੀ ਸਾਧ ਅੱਧਾ ਸਾਧ ਹੈ ਮਨ ਅਸਾਧ ਹੈ ਇਹਦੂ ਅਸਾਧ ਹੋ ਗਦੇ ਜਦ ਅਰੋਗ ਹੋ ਜਾਂਦਾ ਇਹ ਵੀ ਸਾਧ ਹੋ ਜਾਂਦਾ ਇੱਕ ਹੋ ਜਾਂਦਾ ਸਾਧ ਦੇ ਸਬਤ ਮਿਲ ਜਾਂਦਾ ਅਚਾਨੇ ਤੇ ਚਾਰ ਅੱਖਰ ਆਏ ਆ ਇੱਕ ਤਾਂ ਪਏ ਕਿਰਪਾਲ ਪ੍ਰਭ ਪ੍ਰਭ ਔਰ ਹਰ ਦੇ ਵਿੱਚ ਕੀ ਅੰਤਰ ਹੈ ਫਿਰ ਹਰ ਸੋਈ ਜਪਾਤ ਕਿਰਪਾਲ ਕੋਈ ਹਰ ਆਦਮੀ ਆ ਕੇ ਇੱਥੇ ਰੁੱਲੀ ਜਪ ਸਕਦਾ ਕਿਦੋਂ ਕਦੋਂ ਲਿਆ ਕੇ ਭੇੜ-ਭੇੜ ਕੇ ਲਿਆ ਕੇ ਬੰਦੇ ਇਕੱਠੇ ਕਰ ਦੂਦਾ ਦੇ ਨਾਲ ਹੁਣ ਭਗਤ ਥਾਂ-ਥਾਂ ਲਿਆ ਕੇ ਇਕੱਠੀ ਕਰ ਦਿੰਦਾ ਉਹ ਦੇਵੀ ਕਿਰਪਾ ਦੀ ਹੋਵੇ ਹੋਰ ਕੀ ਕਹਾਂ ਮੈਂ ਕਹਿਣ ਨਾਲ ਕਿਸੇ ਦਾ ਕੋਈ ਕਾਰਨ ਬਣਾਇਆ ਕਿਸੇ ਦਾ ਕੋਈ ਕਾਰਨ ਬਣਾਇਆ ਦਾ ਕਿਸੇ ਦਾ ਕੋਈ ਕਾਰਨ ਬਣਾਇਆ ਇਹ ਪ੍ਰਭ ਜਿਹੜਾ ਹੈਗਾ ਪ੍ਰਭਤਾ ਪਰਮੇਸ਼ਰ ਦੀ ਪ੍ਰਥਾਈ ਅੱਛਾ ਇਹ ਕੰਮ ਤਾਂ ਹੋਦਾ ਹੀ ਹੈ ਕਿ ਗੁਬਰੀ ਖੇੜਾ ਦਾ ਉਹ ਤਰ੍ਹਾਂ ਜਿਹਾ ਵੀ ਪਹਿਲਾਂ ਹੀ ਹੁੰਦੀ ਉਹ ਕਰਦਾਈ ਤਾਂ ਉਹ ਵੀ ਚਾਉਂਦਾ ਉਹ ਵੀ ਦੇਖਦਾ ਹੁੰਦਾ ਕਿ ਇਹ ਵਿਦਿਆਰਥੀ ਭੁੱਖਾ ਹੈ ਜਾਦਾ ਪਰੂਗੋਦਾ ਵੀ ਅੰਦਰ ਪਸ਼ੂ ਤੇ ਅੱਛਾ ਕੰਨ ਪਾਣੀ ਪਿਲਾਉਣੇ ਜਾਂਦੇ। ਇਹ 2 ਕਿਲੋਮੀਟਰ ਸੇ ਪੜੀ ਹੋਵੇ ਪਸ਼ੂ ਤੇ ਅੱਛਾ। ਉਤੇ ਰੱਬਾ ਕੋਈ 10 ਕਿਲੋਮੀਟਰ ਵਾਲਾ ਵੀ ਆਇਆ ਹੋਵੇ ਪਾਣੀ ਪ੍ਰਭੂ ਦੇ ਵਿੱਚ ਫਰਕ ਪਾਇਆ ਹੋਇਆ ਕਿਤੇ ਕਿਤੇ ਉਹ ਉਸ ਵੇਲੇ ਪਾਇਆ ਹੋਇਆ ਉਸ ਵੇਲੇ ਲੋਡ ਹੈ। ਕਿਤੇ ਕਿਤੇ ਲੋਡ ਹੁੰਦੀ ਹੈ ਕਿਤੇ ਕਿਤੇ ਪ੍ਰਾਬਲ ਨਾਲ ਸੱਜਾ। ਗੱਲ ਸਮਝ ਆਉਣੀ ਹੈ ਜਿਹੜਾ ਹਰ ਹੈ ਉਹ ਹਰ ਸੇਵਤ ਰਬ ਦੀ ਸਿਮਤ ਹਰਤਾ ਬਣ ਅੰਦਰ ਹੈ ਹਰਤਾ ਜੀਵਦਾਤਾ ਹੈ ਜਿਹਦੀ ਬਜਾ ਠੀਕ ਹੈ ਜੀ ਹਰ ਮੂਲ ਹੈ ਪ੍ਰਭ ਇੱਥੇ ਪਰਮੇਸ਼ਰ ਵਾਸਤੇ ਆਇਆ ਠੀਕ ਹੈ ਜੀ ਹਾਂ ਪ੍ਰਭ ਹੈ ਤੇ ਪ੍ਰਭੂ ਸਰਵਾਕਿ ਤੇ ਫਿਰ ਅੱਗੇ RAM ਦੀ ਗੱਲ ਆ ਜਾਂਦੀ ਨਾਨਕ ਪ੍ਰੀਤ ਲਗੀ ਤਿਨ RAM ਸਿਓ ਤੇ ਹਰੇ RAM ਹੈ ਫਿਰ ਹਾਂ ਹਰੇ RAM ਹਰੇ ਬਿਸਰ ਜੀ ਠੀਕ ਹੈ ਜੀ ਹਰੇ ਰਾਮ ਹਰੇ ਕ੍ਰਿਸ਼ਨ ਕਹਿੰਦੇ ਹਰੇ ਰਾਮ ਹਰੇ ਕ੍ਰਿਸ਼ਨ ਜੁੜਿਆ ਹੋਇਆ ਜੇ ਦੀ ਹਰਸਾ ਤਾਂ ਹਰੇ ਰਾਮ ਉਹ ਵੀ ਕੋਈ ਹਰਾ ਹੋ ਗਿਆ ਕ੍ਰਿਸ਼ਨ ਨੂੰ ਵੀ ਹਰੇ ਕਹਿ ਸਕਦੇ ਆ ਆਪ ਨੂੰ ਵੀ ਹਰੇ ਕਹਿ ਸਕਦੇ ਆ ਤੁਹਾਨੂੰ ਕਹਿ ਸਕਦੇ ਆ ਪਾਣੀ ਪਾਤਾ ਖੂਦ ਦੇ ਵਿੱਚੋਂ ਹਰੀ ਉਹ ਵੀ ਖੂਦ ਦਾ ਪਾਣੀ ਕਿਹੜਾ ਮੁੱਕ ਗਿਆ ਹਾਂ ਜੀ ਸਭਨਾ ਰਾਮ ਰਮੋ ਬੜ ਭਾਗੀਓ ਜਲ ਥਲ ਮਹੀਲ ਸੋਏ ਨਾਨਕ ਨਾਮ ਰਾਧੀ ਐ ਬਿਗਨ ਨਾ ਕੋਈ ਰਾਮ ਰਮੋੜ ਭਾਗਿਓ ਜਲ ਥਲ ਮਹੀਲ ਸੋਏ ਰਾਮ ਨੂੰ ਉਕੜਾ ਤਾ ਐਸਾ ਰਾਮ ਇੱਕ ਅੱਜ ਇਥੇ ਰਾਮ ਨੂੰ ਦੇਖੋ ਉਕੜਾ ਜਿਹੜਾ ਰਾਮ ਸਭ ਦੇ ਅੰਦਰ ਆਹ ਕੋਚਨ ਆਪਣੇ ਅੰਦਰ ਹੈ ਸਭ ਦੇ ਰਾਮ ਇਹਦੇ ਨਾਲ ਲੱਭਜੋ ਜਦਾਂ ਕੋ ਰਾਮ ਜਲ ਥਲ ਮਹੀਲ ਸੋਏ ਕਾਲੇ ਵਿੱਚ ਜਿਹੜੇ ਜੀਵ ਉੱਥੇ ਵੀ ਰਾਮ ਹੈਗਾ ਖਾਲੇ ਵਿੱਚ ਜੀਵ ਨੇ ਉੱਥੇ ਵੀ ਰਾਮ ਹੈਗਾ ਤਾਂ ਕਿ ਮਈਲ ਦੇ ਵਿੱਚ ਵੀ ਰਾਮ ਹੋਏਗਾ ਹਰ ਜਗ੍ਹਾ ਰਾਮ ਹੈਗਾ ਜਿੱਥੇ ਆਤਮਾ ਹੈ ਉੱਥੇ ਰਾਮ ਹੈ ਆਤਮਾ ਰਾਮ ਨੂੰ ਨਿਓ ਪਰਵਾਣ ਹੀ ਰਾਮ ਹੈ ਠੀਕ ਹੈ ਜੀ ਆਪਣੇ ਨਾਲ ਨਾਲ ਜੁੜ ਜਾਓ ਆਪਣੇ ਮੂਲ ਨਾਲ ਜੁੜ ਜਾਓ ਕਿ ਭਾ ਗਿਓ ਆਪਣੇ ਮੂਲ ਨਾਲ ਜੁੜ ਜਾਓ ਆਪਣੇ ਆਪ ਨਾਲ ਜੁੜ ਜਾਓ ਫਿਰ ਕੁਝ ਨਹੀਂ ਛੱਡੋ ਜਰ ਕੋਈ ਛੁੱਟੇ ਵੇਲਾ ਆਪਣੇ ਹੋਰ ਨਾਲ ਦੀ ਜੁੜਿਆ ਜਾਂਦਾ ਚੱਲ ਚੱਲ ਮਈ ਸੋਏ ਧਾਨ ਕਾ ਨਾਮ ਜੁੜ ਕੇ ਇੱਥੇ ਦੋ ਪਦਾਰਥ ਮਿਲ ਗਏ ਨਾਮ ਦੀ ਆਰਾਧਨ ਉਸ ਜੁੜ ਕੇ ਧਾਨ ਕਾ ਨਾਮ ਬਿਲੇ ਜੀਵੋ ਕਿ ਨਾਮ ਆਰਾਧਿਏ ਫਿਕਰ ਨ ਲੱਗਣੇ ਲੱਗੇ ਕੋਈ ਬਚਾਰੇ ਬਿਤਰ ਨਹੀਂ ਹੋ ਸਕਦਾ ਆਰਾਧਨ ਨਾਲ ਤੇ ਨਾ ਦੂਜੇ ਕੋਈ جے کوئی اعلان لوپ نئیں کرے تو بیلو گا کوئی دیگر دئی دےڑے آ سکتا او دے اندر دے संतोष سوت رام کار لگی ہازر پڑی بھگتاں کا بولیا پروان ہے درگا پویں ઠાیں بھگتاں تیری ٹیک ਕਿ ਨਾ ਵਰਜੀ ਜੂਰ ਬੋਲ ਲੈਂਦੇ ਸਤਿਗੁਰੂ ਦੇ ਪਰੇਡ ਹੋਈ ਜਾਂ। ਦਰਗਾ ਪਵੈ ਥਾਂ। ਦਰਗਾ ਬਾਬਾ ਥਾਂ ਹੀ ਜਗ੍ਹਾ ਮਿਲਦੀ ਹੈ। ਜੋ ਦੇ ਵਿੱਚ ਦੇ ਵਿੱਚੋਂ ਦਾ ਭਗਤ ਬੋਲਦੇ ਨੇ ਭਗਤ ਜਿਹੜਾ ਆਪਣੀ ਵਰਜੀ ਤੋਂ ਕੁਝ ਬੋਲ ਦੇ ਦੇ। ਜਿਵੇਂ ਬੁਲਾਉਂਦੇ ਬੋਲਦੇ ਨੇ। ਭਗਤਾਂ ਤੇਰੀ ਟੇਕ ਰੱਤੇ ਸੱਚ ਭਗਤਾਂ ਤੇਰੀ ਡੇਕ ਰੱਤੇ ਸੱਚ ਨਾਲੇ ਭਗਤਾਂ ਨੂੰ ਤੇਰੀ ਡੇਕ ਹੈ ਤੇਰਾ ਹੀ ਆਸਰਾ ਹੈ ਰੱਤੇ ਸੱਚ ਨਾਲੇ ਸਾਚੇ ਦੇ ਲੋਭ ਦੇ ਨਾਲ ਲੱਗੇ ਹੋਏ ਹੁੰਦੇ ਰਹੋ ਜਿਸ ਨੂੰ ਹੋਏ ਕਿਰਪਾਲ ਕਿਰਪਾ ਹੋ ਜਾ ਹੋ ਜਾ ਤੇਰੇ ਦਿਆਲ ਉਹਨਾਂ ਮਿਹਰ ਪਾਈ ਭਗਤ ਦੇ ਦਿਆਲ ਭਗਤ ਵੀ ਤੇਰੇ ਦਿਆਲ ਤੇਰੇ ਵਰਗਾ ਸੁਭਾਅ ਰੋਇਆ ਓਨਾ ਹੈ ਜੀ ਉਹਨਾ ਬੇਹਿਬਾਨ ਉਹ ਉੱਤੇ ਤੂੰ ਨੇ ਜੇ ਭਗਤ ਵਿਗੜ ਜਾਣਾ ਵਿੱਚ ਤੂੰ ਬਿਲਕੁਲ ਗਿਆਨ ਮਿਲ ਗਿਆ ਤੂੰ ਕਹਾਂ ਨਾ ਨਬ ਫਿਰ ਵਿਗੜ ਪੈ ਜਾਂਦਾ ਉੱਤੇ ਠੀਕ ਹੈ ਫਿਰ ਗਾਣ ਨਹੀਂ ਮਿਲਦਾ ਹੈ ਦੁੱਖ ਦਰਦ ਵੱਡ ਰੋਗ ਨਾ ਪੋਹੈ ਤਿਸ ਮਾਈ ਨਾ ਦੁੱਖ ਨਾ ਦਰਦ ਨਾ ਵੱਡਾ ਕੋਈ ਰੋਗ ਕਾ ਮਾਇਆ ਦਾ ਕੋ ਉਹਨਾਂ ਨੂੰ ਕੁਝ ਵੀ ਪਹੁੰਚ ਨਹੀਂ ਸਕਦਾ ਛੋ ਨਹੀਂ ਸਕਦਾ ਉਹਨਾਂ ਤੇ ਕੋਈ ਇਹਦਾ ਅਸਰ ਹੀ ਨਹੀਂ ਹੁੰਦਾ ਮਾਇਆ ਦਾ ਦੁੱਖ ਦਰਦਾਂ ਦਾ ਕੋਈ ਅਸਰ ਨਹੀਂ ਠੀਕ ਦੁੱਖ ਦਰਦ ਉਹਨੂੰ ਭਾਵੇਂ ਹੁੰਦੇ ਨੇ ਪਰ ਉਹਨਾਂ ਦੇ ਉੱਤੇ ਅਸਰ ਨਹੀਂ ਹੁੰਦਾ ਉਹਨਾਂ ਨੂੰ ਵਿਆਪਦੇ ਨਹੀਂ ਜੀ ਹਾਂਜੀ ਭਗਤਾਂ ਇਹ ਆਧਾਰ ਗੁਣ ਗੋਬਿੰਦ ਗਾएं ਭਗਤਾਂ ਦਾ ਆਧਾਰ ਕੀ ਹੈ ਗੋਬਿੰਦ ਦੇ ਗੁਣ ਗਾਉਣਾ ਹੀ ਰਾਹ ਹੈ ਭਗਤਾਂ ਦਾ ਕੇ ਕੋਣ ਸਾਹੋ ਸਾਹੋ ਸਦਾ ਸਦਾ ਦਿਨ ਰੈਣੀ ਇੱਕੋ ਇੱਕ ਧਿਆਇ ਸਦਾ ਸਦਾ ਦਿਨ ਰੈਣੀ ਇੱਕੋ ਇੱਕ ਧਿਆਇ ਤੇ ਨਾਲ ਸਦਾ ਸਦਾ ਇੱਕ ਦੇ ਵਿੱਚ ਧਿਆਨ ਲਖਦੇ ਇੱਕੋ ਕੇ ਰਹਿੰਦੇ ਨੇ ਉੱਤਰ ਦੂਏ ਜਰੀ ਦਾ ਧਿਆਨ ਦੀ ਦਾ ਅਕਲ ਕਰਦੇ ਇੱਕੋ ਇੱਕਦਮ ਨਾਲ ਬਾਹਰ ਲੈ ਤੇ ਹੇਲ ਤੋਂ ਲੱਗੇ ਰਹਿੰਦੇ ਨੇ। ਭਾਇਆ ਤੋਂ ਲੱਗੇ ਰਹਿੰਦੇ ਨੇ। ਭਾਇਆ ਦਾ ਧਿਆਨ ਹੈ ਜੀ। ਅੱਛਾ ਜੀ। ਇੱਕੋ ਔਰ ਇੱਕ ਦੇ ਫਰਕ ਹੈ ਜੀ ਦੋਹਾਂ ਕਰਾਂ ਚ? ਇੱਕੋ ਇੱਕ ਧਿਆਨ ਕੇਵਲ ਇੱਕੋ ਧਿਆਨ ਨੇ ਤੇ। ਕੇਵਲ ਵਾਸਤੇ ਲੱਗਿਆ। ਅੱਛਾ ਜੀ। ਇੱਕੋ ਇੱਕ ਦਾ ਵਗਦਾ ਕੇਵਲ ਇੱਕ। ਤੇ ਇੱਕ ਦਾ ਭਾਵ ਇੱਥੇ ਫਿਰ ਮੂਲ ਹੋ ਗਿਆ। ਇਹ ਆਨੇ ਕਿਸਾ ਆਏ ਨੇ ਧਿਆਨ ਦੋ ਦੇ ਪਹਿਲਾਂ ਬੁੱਧੋ ਤੇ ਆਨ ਲੱਗਾ ਤੇ ਦੋ ਤੇ ਆਨ ਲੱਗਾ ਅੱਛਾ ਜੀ ਇਹ ਆਨੇ ਕਰੇ ਮਤਲਬ ਇਹ ਆਨੇ ਦੋ ਹਰੀਕ ਦੋ ਇੱਕ ਹੋ ਗਏ ਠੀਕ ਹੈ ਜੀ ਦੋ ਵੱਖਰਾ ਮਨ ਵੱਖਰਾ ਹੈ ਧਿਆਨ ਨਾਲ ਹੈ ਜੇ ਤੇ ਆਨੇ ਠੀਕ ਹੈ ਜੀ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਪੀਵਤ ਅੰਮ੍ਰਿਤ ਨਾਮ ਉਬਰਦਾਨ ਨੂੰ ਪੀਦੇ ਰਹਿੰਦੇ ਨੇ ਚਾਲੂ ਹਾਂ ਜਨ ਜਨ ਜਨ ਜਨ ਗੁਰਬਾਣੀ ਬਚਾਲਦੇ ਰਹਿੰਦੇ ਨੇ ਵਰਦਨਾ ਵਿੱਚੋਂ ਪੀਦੇ ਰਹਿੰਦੇ ਨੇ ਨਾਮ ਲੈ ਰਹੇ ਆਏ ਨਾਮ ਭਰਪੂਰ ਰਹਿੰਦੇ ਰਹੇ ਰਹਿੰਦੇ ਦੋਬਲ ਦਕੋਡਾ ਕਰ ਰਹੇ ਰਹਿੰਦੇ ਦੋਬਲ ਠੀਕ ਹੈ